श्लोक मोहल्ला पहला तां की रजाए लिखिया रजा रजा लेखा है लेखा फरमान हुंदा है ਉਦੇ ਨਾਲੇ ਜੋ ਕੁਝ ਅਬ ਕਿਆ ਕੀਜੇ ਪਾਂਡੇ ਦੱਸ ਕੀ ਕਰੇਗਾ ਤੂੰ ਨਾਲੇ ਪੜਨਾ ਵੀ ਮੰਦਾ ਇਹ ਤਾਪਣਾ ਕਿ ਤਾਪਣਾ ਜੀ ਤਾਂ ਕੀ ਤਾਂ ਕੀ ਉਹ ਤੁਸੀਂ ਦੀ ਅੱਛਾ ਜੇ ਤਾਂ ਹੈ ਨਾ ਅਵੇ ਤਾਂ ਪਰਮੇਸ਼ਰ ਦੀ ਰਜ਼ਾਏ ਰਜ਼ਾਾ ਠੀਕ ਹੈ ਤਾਂ ਕੀ ਰਜ਼ਾਏ ਲਿਖਿਆ ਪਾਏ ਅਬ ਕਿਆ ਕੀਜੇ ਪਾਂਡੇ ਕਹਿੰਦਾ ਮਲਾਉ ਦੇਦਾ ਜਾਈ ਲਿਖ ਲਿਖਦਾ ਕੋਈ ਸਾਨੂੰ ਪ੍ਰਾਪਤੀ ਹੁੰਦੀ ਹੈ ਪ੍ਰਾਪਤੀ ਉਹੀ ਆ ਜੋ ਤਾਂ ਹੁਕਮ ਹੈ ਠੀਕ ਹੈ ਹੋਰ ਕੁਝ ਕਿਸੇ ਦਾ ਚਾਰਾ ਚੱਲਦਾ ਚਾਰਾ ਕੋਈ ਨਹੀਂ ਚੱਲਦਾ ਦਾਨਪੁਰ ਹੋਏ ਨਿਬੜਿਆ ਹੰਡਾ ਜੀ ਕਮੰਦੇ ਜਿਹੜਾ ਹੁਕਮ ਹੋ ਜਾਂਦਾ ਉਹ ਟੱਲ ਕੋਈ ਮੋੜ ਨਹੀਂ ਸਕਦਾ ਉਹ ਵਰਤੀ ਹੋਏ ਹੋ ਗਈ ਨ ਬਲਣਾ ਉਹ ਨਹੀਂ ਰੋਕਿਆ ਨਹੀਂ ਜਾ ਸਕਦਾ ਹੁਕਮ ਨੂੰ ਉਹ ਹੋ ਗਈ ਨ ਬਲਣਾ ਤਾਂ ਨਹੀਂ ਛਟਣਾ ਇਹਦਾ ਹੁਕਮ ਉਹਨੇ ਉਹਦਾ ਕੋਈ ਉਪਾਏ ਨਹੀਂ ਉਹ ਪਤਰੀਆਂ ਦੇ ਵਿੱਚ ਤੇਰੇ ਜਿਹੜਾ ਹੋਇਆ ਇਹਦਾ ਉਪਾਏ ਕਰਦੀ ਕੋਈ ਉਪਾਏ ਨਹੀਂ ਹੁਕਮ ਦਾ ਹੈਗਾ ਠੰਡਾ ਜੀਕ ਮੰਨਦੇ ਜੀ ਹੁਕਮ ਨੂੰ ਕਮੋਦੇ ਤੇ ਰਹਿੰਦੇ ਨੇ ਹੁਕਮਾਂ ਦੇ ਵਿੱਚੇ ਘੁੰਮਦੇ ਰਹਿੰਦੇ ਨੇ ਘੜਣਾ ਤੋਲਣਾ ਬੰਨ ਜੀਵ ਜਿਹੜੇ ਅਸੀਂ ਆਪਣਾ ਜੀਵਨ ਬਤੀਤ ਕਰਦੇ ਆ ਉਹਦੇ ਵਿੱਚੇ ਕਰਨਾ ਪੈਂਦਾ ਕੋਈ ਇਲਾਜ ਨਹੀਂ ਹੈਗਾ ਇਹਦਾ ਕੋਈ ਉਪਾਇ ਨਹੀਂ ਹੈਗਾ ਇਹਦਾ ਕਿਉਂਕਿ ਭਾਬਾ ਦਾ ਹੰਡੇ ਜੀ ਕਮਾਂਦੇ ਕਮਾਉਂਦੇ ਹੀ ਹੁਕਮ ਹੈਗਾ ਉਹੀ ਜੀ ਨੂੰ ਉਸੇ ਦੇ ਵਿੱਚ ਰਹਿਣਾ ਪੈਂਦਾ ਉਹੀ ਕਮਾਉਣਾ ਪੈਂਦਾ ਹੈ ਜੀ ਬਿਲਕੁਲ ਉਹ ਨਹੀਂ ਮੋੜਿਆ ਜਾ ਸਕਦਾ ਕੋਈ ਇਲਾਜ ਨਹੀਂ ਸਾਡੇ ਕੋਲ ਹੈਗਾ ਠੀਕ ਹੈ ਜੀ ਮਹੱਲਾ ਦੂਜਾ ਨਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਉਹ ਜਿਹੜੀ ਉਤਲੀ ਗੱਲ ਆ ਇਹਨੂੰ ਉਹਦੀ ਵਿਆਖਿਆ ਕਰਤੀ ਪਾਣੇ ਚ ਚੱਲਣਾ ਪੈਣਾ ਕਹਿੰਦਾ ਨਾ ਕਰਨਾ ਤੇ ਹੱਥ ਠੀਕ ਹੈ ਨਾ ਪਾਈ ਹੋਈ ਆ ਖਸਮ ਨੇ ਆਪਣੇ ਹੱਥੇ ਚ ਫੜੀ ਹੋਈ ਦੇ ਹੱਥੇ ਚ ਗਾਇਨਾ ਪਉਣਾ ਉਹਨੇ ਹੁਕਮ ਜਿ ਰਹਿਣਾ ਪਉਣਾ ਖਸਮ ਹੱਥ ਕਰ ਤੱਕੇ ਦੇ ਕਰਤੇ ਜਿਹੜੀ ਆ ਧੱਕੇ ਦੇ ਕੇ ਲੈ ਜਾਂਦੀ ਹੈ ਤੇ ਆ ਕਰ ਦੌਰ ਦੇ ਜੰਦਾ ਜਿੱਥੇ ਲੈ ਕੇ ਜਾਣਾ ਘੋੜੇ ਨੂੰ ਮਾਲਕ ਨੇ ਜੋੜਨਾ ਤੰਗਾ ਘੋੜੇ ਨੂੰ ਹੱਥ ਚ ਘੋੜੇ ਨੂੰ ਪੁੱਛਦਾ ਵੀ ਫਲਾਣੇ ਥਾਂ ਨੂੰ ਜਾਣਾ ਸੀ ਉਹਦਾ ਜੋੜ ਕੇ ਤੰਗ ਨੂੰ ਉੱਤੇ ਬਹਿ ਜਾਂਦਾ ਹੈ ਇਹ ਉਹ ਗੱਲ ਆ ਨਕਰਨਤ ਖਸਮਾਤ ਕਰਤ ਧੱਕੇ ਦੇ ਜਹਾਂ ਜਾਣੇ ਤਹਾ ਘਾਣੇ ਸੱਚ ਹੈ ਸੱਚੀ ਗੱਲ ਹੈ ਬਈ ਜਿੱਥੇ ਦਾਣੇ ਨੇ ਪੈਣੇ ਚੋੜਨੇ ਉੱਥੇ ਜਾ ਕੇ ਜੇ ਅਮਰੀਕਾ 'ਚ ਲਿਖੇ ਨੇ ਉੱਥੇ ਨਹੀਂ ਆਸੇਲੀਆ ਚੋੜਨੇ ਪੈਣਗੇ ਵਰਜੀ ਦਾ ਕੋਈ ਜਾਂਦਾ ਕਿੱਥੇ ਕੇ ਪੌੜੀ ਸੱਬੇ ਗੱਲਾਂ ਆਪ ਥਾਠ ਰਚਾਏ ਆਪੇ ਹੀ ਘਾਲਿਓਨ 100 ਦਾ ਸਾਲ ਫਿਰਦੇ ਗੰਢ ਰਹੇ ਹੈ ਗੱਲ ਕਰਨੀ ਹੈ ਗੱਲ ਸਾਰਾ ਪ੍ਰੋਗਰਾਮ ਉਹਦਾ ਉਹ ਲਿਖਿਆ ਹੈ ਉਹਦੇ ਅਨਸਾਰ ਹੀ ਸਭ ਸੰਸਾਰ ਚੱਲਦਾ ਸਾਰੇ ਜਗ੍ਹਾ ਜਗ੍ਹਾ ਉਹਨੇ ਬਿਠਾਲੇ ਹੋਏ ਨੇ ਕਿਸੇ ਨੂੰ ਕਿਸੇ ਕੰਮ ਲਾਇਆ ਹੋਇਆ ਕਿਸੇ ਨੂੰ ਕਿਸੇ ਕੰਮ ਲਾਇਆ ਹੋਇਆ ਹਾਂ ਅਸੀਂ ਸੋਚ ਸਕਦੇ ਹਾਂ ਕੁਝ ਕਰ ਨਹੀਂ ਸਕਦੇ ਆਪੇ ਜੰਤੂ ਪਾਏ ਆਪ ਪਿਤ ਪਾਲਿਓਨ ਆਪੇ ਪੈਦਾ ਕੀਤੇ ਨੇ ਜਾਂ ਤਾਂ ਆਪ ਕਰਦਾ ਹੈ ਆਪੇ ਰਚਨ ਚਾਹੇ ਆਪੇ ਹੀ ਕਹਾਲੀ ਨਾ ਜਿਹੜੀ ਰਚਨ ਵੀ ਇਹ ਆ ਉਹਨੇ ਰਚਾਇਆ ਹੈ ਕਾਲ ਵੀ ਹੁਕਮ ਦੇ ਨਾ ਗੱਲ ਰਚਨ ਇਹ ਚਾਹੁੰਦਾ ਹੈ ਦੇਖੋ ਨਾ ਮਾਲਕ ਚਾਹੁੰਦਾ ਘੋੜਾ ਚੱਲਦਾ ਲੋਕ ਦੇ ਨਾਲ ਹੀ ਚੱਲਦੀ ਚੰਦਾਰ ਦੀ ਠੀਕ ਹੈ ਜੀ ਰਜਾ ਉਹਦੀ ਇਹ ਕਰਦਾ ਤਾਂ ਇਹੀ ਹੈ ਠੀਕ ਹੈ ਜੀ ਪਰ ਹੁਕਮ ਚ ਰਹਿ ਕੇ ਕਰਨਾ ਪਊਗਾ ਹਾਂ ਉਹ ਗੁਪਤਾ ਹੈ ਪ੍ਰਗਟ ਹੈ ਇੱਕ ਗੁਪਤ ਕਰਤਾ ਹੈ ਇੱਕ ਪ੍ਰਗਟ ਕਰਤਾ ਪ੍ਰਗਟ ਕਰਤਾ ਜੀਵ ਹੈ ਗੁਪਤ ਕਰਤਾ ਹੋਏ ਨਾਥ ਨਹੀਂ ਨਦੀ ਦੀ ਸਪਾਏ ਹੈ ਅਗਲ ਕਰਤਾ ਨਥ ਜਿਹਦੇ ਹੱਥ ਚ ਉਹ ਹੈ ਹਾਦੀ ਨਾ ਕਰਤਾ ਹੈ ਆਦਮੀ ਹੈ ਕਰਕੇ ਬੈਠਿਆ ਸੀ ਮੌਕੇ ਤੇ ਕਰਦਾ ਤਾਂ ਇਹਦੀ ਹੀ ਸਭ ਨੂੰ ਠੀਕ ਹੈ ਜੀ ਤਾਂ ਰੱਖੇ ਕੰਠ ਲਾਏ ਮਦਰ ਨਿਹਾਲਿਓਂ ਨਾਨਕ ਭਗਤਾਂ ਸਦਾ ਆਨੰਦ ਭਉ ਦੂਜਾ ਜਾਲਿਓਂ ਜਿਹੜੇ ਆਪਣੇ ਦਾਸ ਆ ਉਹਨਾਂ ਨੂੰ ਗੰਠ ਨਾ ਲਾ ਕੇ ਰੱਖਦਾ ਆਪਣੇ ਚਾਤੀ ਨਾ ਲਾ ਕੇ ਰੱਖਦਾ ਦਾਸਾਂ ਆਪ ਲਾ ਕੇ ਰੱਖਦਾ ਆਪਣਾ ਗਿਆਨ ਲਾ ਕੇ ਰੱਖਦਾ ਉਹ ਮਤਲਬ ਹੈ ਜੰਮਣ ਮਰਤੋਂ ਤਾਂ ਰਹਿੰਦੇ ਨੇ ਉਹਨਾਂ ਦੇ ਖੰਠ ਦੇ ਨਿਕਲਦੀ ਆ ਗਿਆਨ ਨਿਕਲਦਾ ਹੈ ਆਤਮ ਗਿਆਨ ਉਹਨਾਂ ਦੇ ਗੰਠ ਨੂੰ ਆ ਦਾ ਜਿਹੜਾ ਨਾਮ ਲੱਗਿਆ ਰਹਿੰਦਾ ਨਦਰ ਨਹੀਂ ਹੱਲੀ ਹਨ ਤਾਂ ਕਿਰਪਾ ਕਰ ਦਿੰਦਾ ਨਾਮ ਦੇ ਗੰਠੇ ਤੋਂ ਉਚਾਲ ਨਿਕਲਦੇ ਨੇ ਜੰਮਣ ਮਨ ਤੋਂ ਬਚ ਜਾਂਦੇ ਨੇ ਕਿ ਉਹਨਾਂ ਨੂੰ ਆਪਣੇ ਗੰਠ ਨਹੀਂ ਲਾਉਂਦਾ ਉਹਨਾਂ ਦੇ ਗੰਠ ਵਿੱਚ ਨਾਮ ਭਰਉਂਦਾ ਹੈ ਜੀ ਆਹ ਦੇ ਗੰਠ ਵਿੱਚ ਆਪਣਾ ਨਾਮ ਠੀਕ ਹੈ ਜੀ ਨਾਨਕ ਭਗਤਾਂ ਸਦਾ ਆਨੰਦ ਭਾਉ ਦੂਜਾ ਜਾਲਿਓਨ ਭਗਤਾਂ ਨੇ ਆਨੰਦ ਕਿਉਂ ਰਹਿਣਾ ਉਹਨਾਂ ਦੇ ਮਾਇਆ ਦੀ ਭੁੱਖ ਅੰਦਰੋਂ ਜਲ ਜਾਂਦੀ ਹੈ ਦੂਜਾ ਖਤਮ ਹੋ ਜਾਂਦਾ ਇਸ ਕਰਕੇ ਮਾਇਆ ਦੀ ਭੁੱਖ ਰਹਿੰਦੀ ਹੋਈ ਸਾਰੇ ਮਾਇਆ ਦੇ ਹੀ ਨੇ ਸੰਸਾਰ ਦੇ ਮਾਇਆ ਦੀ ਭੁੱਖ 'ਚ ਆਨੰਦ ਨਹੀਂ ਹੋ ਸਕਦਾ ਹਾਂਜੀ ਇੱਥੇ 28ਵੀਂ ਪੌੜੀ ਸਮਾਪਤੀ ਹੈ ਜੀ